ਸੋਈਆ ਹੀਰ ਕੈ ਸਿਆੰ ਸਤਰਾ ਜਿਤ ਕੋ ਮਨ ਲੈ ਕਰਮ ਹੈ ਪੁਨਤਾ ਸਿਰ ਮਾਰੀ ਜਾਹਿ ਦੋਸ਼ ਦੇਉ ਸੋਈ ਲੈ ਜੜ ਕੋ ਭਰੇ ਭਾਂਤ ਚੌਕ ਕਹੈ ਸਭ ਜਾਦ ਵਿਯੋ ਸੋ ਪਿਖੋ ਰਿਸ ਕੈਸੀ ਕਰੀ ਗਿਰਧਾਰੀ ਸੋਏ ਭਾਂਤ ਕਬਿਤਨ ਬੀਚ ਕਥਾ ਜਗ ਵੈ ਕਬ ਬਿਥਾਰੀ ਸੋਈਆ ਹਾਥ ਰਿਓ ਮਨ ਕੋ ਧਰ ਤਿੰਨ ਡੈਕ ਨਾ ਕਾਹੂ ਨਿਹਾਰਿਓ लज्जत वै खस्यानो कनों दुविधा कर धाम की ओर सिधारयो बैर परयो हमरो हर सो औ कलंक चढ़यो गे ओ प्रातर मारयो पीर प्रीत अधीर पयो दुहता देो श्याम ही चित धारयो इत श्री दशम सिकंद पुराणे विचित्र नाटक के कृष्णा अवतारे सतराजित को मणि दीप सतराजित की दुहता को व्याख्या कथन सोइया ਬੋਲਤ ਜੋ ਬੇਦਨ ਕੀ ਬਿਦਜੈਸ ਕਹੀ ਤਦ ਬਿਆਰ ਧਾਇਓ ਸਦ ਭਾਵਨ ਕੋ ਕਵ ਸਿਆਮ ਪਨੈ ਦੇ ਕੋ ਸਭ ਲੋਗਨ ਮੈਂ ਜਸ ਪਾਵਤ ਹੈ ਉਪਮਾ ਲక్ష్ਮੀ ਕੀ ਨਾ ਤਾ ਸਮਯੋ ਕਹਿ ਬੋ ਬਨ ਆਯੋ ਉਪਤਾਈ ਕੇ ਵਿਆਹਨ ਕਾਜ ਮਾਨ ਭਲੈ ਕਨ ਸਿਆਮ ਬੁਲਾਯੋ ਸ੍ਰੀ ਬ੍ਰਿਜ ਸੁਨੇ ਬਤੀਆ ਸੁਭ ਸਾਜ ਜਨੇ ਤਹਾ ਆਪ ਸੋ ਸੁਣ ਕੈ ਪ੍ਰਭ ਕੋ ਸਭ ਆਗੇ ਹੀ ਤੇ ਮਿਲਬੇ ਹੀ ਕੋ ਧਾਏ ਆਦਰ ਸੰਗ ਲਵਾਏ ਕਹਿ ਜਾਏ ਵਿਆਹ ਕੀ ਉਹ ਜਿਦਾਨ ਦਿਵਾਏ ਐਸੇ ਵਿਆਹ ਪ੍ਰਭੂ ਸੋ ਪਾਏ ਤ੍ਰਿਆ ਸੰਗ ਲੈ ਕਰ ਧਮ ਆਏ ਇਤ ਵਿਆਹ ਸੰਪੂਰਨ ਹੋਤ ਪयो ਲਛਿਆ ਗ੍ਰਹਿ ਪਰ ਸੰਗ ਸਵਈਆ ਤਉਹੀ ਲੋ ਐਸੋ ਸੁਣੀ ਬਤੀਆ ਲਛਿਆ ਗ੍ਰਹਿ ਮੈਂ ਸੁਤ ਪੰਡ ਕੇ ਆਏ ਗਾਇ ਸਮੇ ਸਭ ਮਿਲ ਕੌਰਨ ਚਿਤ ਬਿਖੈ ਕਰਨਾ ਨ ਬਸਾਏ ਐਸੋ ਵਿਚਾਰ ਕੀਏ ਚਿਤ ਮੈ ਸੋ ਤਹਾਂ ਕੋ ਚਲੈ ਸਭ ਬਿਸ਼ਨ ਬੁਲਾਏ ਐਸੇ ਵਿਚਾਰ ਸੋ ਸਾਜ ਕੈ ਸੇ ਅੰਧਨ ਸ੍ਰੀ ਬ੍ਰਿਜਨਾਥ ਤਹਾਂ ਕੋ ਸਿਧਾਏ ਸੋਈਆ ਕਾਣ ਚਲਿ ਉਤ ਕੋ ਜਵਹੀ ਬਰਮਾ ਕਰਤ ਤੋਇਤ ਮੰਤਰ ਵਿਚਾਰਿਓ ਲੈ ਅਕਰੂਰ ਕੋ ਆਪਣੇ ਸੰਗ ਕਹਿਓ ਹਰੇ ਖਾਨ ਕਹੂੰ ਕੋ ਥੀਲਾ ਯਾ ਤੇਰੇ ਮਿਲ ਕੈ ਮਨ ਐਸੇ ਵਿਚਾਰ ਕੀਓ ਤੇ ਮਾਰਿਓ ਲੈ ਬਰਮਾ ਕਿਰਤ ਬਾਦ ਕੈ ਮਨ ਆਪਣੇ ਧਾਮ ਕੀ ਓਰ ਸਿਧਾਰਿਓ ਚੌਪਈ ਸਤ ਅੰਨਾ ਵੀ ਸੰਗ ਚਲਾਇਓ ਜਦ ਸਤਰਾਜਿ ਕੋ ਤਿਨ ਘਾਇਓ ਇਹ ਤਿਨ ਬਦ ਕੈ ਨੇ ਆਏ ਉਤੈ ਸੰਦੇਸ ਸਿਆਮ ਸੁਨ ਪਾਏ ਦੂਤ ਬਾਜ ਕਾਹਨ ਸੋ ਚੌਪਈ ਪ੍ਰਵ ਸੋ ਦੂਤਨ ਬੈਨ ਉਚਾਰੇ ਸਤਰਾ ਜਿਤ ਕ੍ਰਿਤ ਬਰਮਾ ਮਾਰੇ ਮਾਨ ਧਨ ਛੀਨ ਤਾ ਹੈ ਤੇ ਲਇਓ ਤੋਹ ਤ੍ਰਿਆ ਕੋ ਆਤ ਪਤ ਇਹ ਵਿਦ ਸੁਨ ਪਾਇਓ ਛੋਰ ਔਰ ਸਭ ਆਇਓ ਹਰ ਆਵਣ ਕ੍ਰਿਤ ਬਰਮੈ ਜਾਨੀ ਸਤ ਧੰਨਾ ਸੋ ਬਾਤ ਬਖਾਨੀ ਅੜਿਲ ਕਹੋ ਸਤ ਧੰਨਾ ਬਾਤ ਅਬਾਹਾਂ ਕਿਆ ਕਰੈ ਕਹੋ ਪਰੈ ਕਹਿ ਜਾਏ ਕਹੋ ਲਰ ਕੈ ਮਰੈ ਦੁਇ ਮੈਂ ਇੱਕ ਮੋਹ ਕਹੋ ਸਮਝਾਏ ਕੈ ਉਹ ਕੋ ਪਾਇ ਕੈ ਸਿਆਮ ਮਹਾਰਾਜ ਆਏ ਕੈ ਕ੍ਰਿਤ ਬਰਮਾ ਕੀ ਬਾਤ ਸੁਨ ਤਿਨਿ ਜੋ ਕਹਿਓ ਜਦ ਪਦ ਬਲੀ ਪਰ ਚੰਡ ਹਣਿਓ ਅਰਜੋ ਚਹਿਓ ਤਾ ਸੋ ਹੰਪੈ ਬਲ ਨ ਲਰੈ ਪੁਨ ਜਾਏ ਕੈ ਸੇ ਛਿਨ ਮੈਂ ਮਾਰ ਦਏ ਸੁਖ ਪਾਇ ਕੈ ਬਤੀਆ ਸੁਨ ਤਿਨ ਕੀ ਅਕਰੂਰ ਪੈ ਆਇਓ ਪ੍ਰਭ ਦੁਭਗਾ ਕੋ ਭੇਦ ਸੋ ਤਾਇ ਸੁਨਾਇਓ ਤਿਨ ਕਹਿਓ ਆਪ ਤੇਰੋ ਇਹੀ ਉਪਾਏ ਹੈ ਉਪਰਾਪਤੇ ਬਚ ਹੈ ਸੋ ਜੋ ਪ੍ਰਾਰਭ ਚਾਏ ਹੈ ਸਵਿਆ ਦੈ ਮਨ ਤਾਏ ਉਦਾਸ ਪਿਓ ਕੇ ਔਰ ਭਜੋ ਚਿਤ ਮੈਂ ਇਹ ਧਾਰਿਓ ਮੈਂ ਅਪਰਾਧ ਕੀਓ ਹਰ ਕੋ ਮਨ 헤ਤ ਬਲੀ ਸਤਰਾਜ ਤਮਾਰਿਓ 타हे के हेत गुसा कर श्याम ਸਭੈ ਆਪਣਉ purkh hath sambhariyo जौरहओ तव मारत है ए कह डर उतर ਔਰ सुधारियो दोहरा ਸਤ ਨਮਨ ਲੈ ਜਾਹ ਭਜ ਗਿਉ ਤਰਾਸ ਵਢਾਏ ਸਿੰਦਨ ਪੈ ਚੜ ਸਿਆਮ ਜੂ ਤਾਹੀ ਪਹੁੰਚਿਉ ਜਾਏ ਪਉ ਪਿਆਦਾ ਸਤਰ ਹੋਏ ਭਜੋ ਸੋ ਤਰਾਸ ਵਢਾਏ ਤਦ ਜਦ ਵੀਰ ਕਿਰਪਾਨ ਸੋ ਮਾਰਿਉ ਤਾਕੋ ਜਾਏ ਖੋਦ ਭਇਉ ਤੇ ਮਾਰ ਕੇ ਮਨ ਨਹੀਂ ਆਈ ਹਾਥ ਮਨ ਨਹੀਂ ਆਈ ਹਾਥ ਜੋ ਕਹੀ ਹਲੀਕੇ ਸਾਥ ਸੋਈਆ ऐसे लख्यो मुस्लिमान मैं सो प्रभु हम ते मन आ छपाई लै अगरूर बनार सकयो मन कहो तेहि की ना कछु सुध पाए श्याम जुमो एक सिखिया है भूपत जा ता हो सो ऐसे सुनाई यो बतिया कह जात रहयो जद वीर की कह मर मैं दुचताई दोहरा जो मुस्ली ते पै गयो तो भूपत सुख पाए लै अपने ते ताम ਗਦਾ ਜੁਦਮੈ ਅਤ ਚਤਰਿ ਯੋ ਤੇ ਸੁਨ ਪਾਏ ਕਵੈ ਦਿਰਜੋਦਨ ਹਰੀ ਤੇ ਸਭ ਸਿਖੀ ਵਿਦਿਆਏ ਸ੍ਰੀਆ ਸਤਤ ਨਾਗੋ ਮਾਰ ਜਵੈ ਜਨਮੰਦਨ ਦਵਾਰ ਭਤੀ ਹੂ ਕੇ ਭੀਤਰ ਆਇਓ ਕੰਚਨ ਕੋਕ ਰੂਪ ਮਨਾਰਸ ਦਾਨ ਕਰੈ ਬਹੁ ਜੋ ਸੁਨ ਪਾਇਓ ਸੂਰਜ ਦਿੱਤ ਉਹੀ ਪਹਿ ਹੈ ਮਰਿ ਜੋ ਆਪਣੇ ਮਨ ਮੈ ਸੋਜਨਾਇਓ ਮਾਨਸ ਭੇਜ ਭਲੋ ਤੇ ਕੋ ਆਪਣੇ ਪਹਿ ਬੋਲ ਪਠਾਇਓ ਜੋ ਹਰੀ ਪੈ ਸੋ ਆਪਤ ਭਇਓ ਤਿਹ ਤੇ ਮਨ ਤੂੰ ਇਨ ਮਾਗ ਲਈਖੈ ਸੂਰਜ ਦੇ ਤੇਰੀ ਦਈ ਤਨ ਸਤ ਕੀ ਜਾਹਿਦ ਦੇਹ ਗਈ ਹੈ ਜਾਹਿਦ ਸ਼ਾਮ ਤ੍ਰਿਆ ਹਰੀ ਭਰਾਤੈ ਮਾਨਹਿ ਕੀ ਮਨ ਬਾਤ ਠਈ ਹੈ ਸੋ ਦਿਗਰਾਏ ਸਭੋ ਹਰ ਖਾਇ ਕੈ ਲੈ ਅਕਰੂ ਰਹ ਫੇਰ ਦਈ ਹੈ ਸੁਇਆ ਜੋ ਸਤ ਰਾਜ ਕਰ ਸੇਵ ਸੋ ਸੂਰਜ ਕੀ ਫੁਨ ਕਾਇ ਤੇ ਪਾਈ जा हर कै कह एकय बद कह धन सतसो अपनी देह गवाई काहे गयो अकरूर थो लै ते फिर सो ब्रजनाथ पै आई सो हर देत पयो ते को मुंदरी मन श्याम जू राग भहाई दोरा बड़े जसह पावत पयो मानद श्री जगवीर जो कटिया सिर दुर्जनन हरता साधन पीर ਇਤਿ ਸ੍ਰੀ 10 ਸਕੰਦੇ ਪੁਰਾਣੇ ਵਿੱਚਤਰਨਾਟ ਗ੍ਰੰਥੇ ਕ੍ਰਿਸ਼ਨ ਆਵਤਾਰੇ ਸਤ ਤੰਨੇ ਕੋ ਵਦਕੇ ਅਕਰੂਰ ਕੋ ਮਨ ਦੇਤ ਭਏ ਕਾਹਨ ਜੂ ਕੋ ਦਿੱਲੀ ਮਾਇ ਆਮਨ ਜਬ ਅਕਰੂਰ ਹੈ ਕੋਮਨ ਦਈ ਜਤ ਦਿੱਲੀ ਕੋ ਸੁਧ ਕਈ ਤਬ ਦਿੱਲੀ ਕੇ ਭੀਤਰ ਆਏ ਪਾਂਡੂ ਪਾਂ ਚਰਨ ਲਪਟਾਏ ਦੋਹਰਾ ਤਬ ਕੁੰਤੀ ਕੇ ਗ੍ਰਹਿ ਗਏ ਕੁਸਲ ਪੁੱਛਿਓ ਜਾਏ ਜੋ ਦੁਖ ਇਨ ਕਹਿਰਵ ਦੇ ਸੋ ਸਬਦ ਬਤਾਏ इंद्रप्रस्थमा कृष्णजू रह माज जब चार तब अर्जुन को संग ले एक दिन चढ़े शिकार सोइया सोह शिकार को लै हरजू सो कनो थो होते और सुधारें गुण सुकर रीस बढे बहु चीत्र और ससे बहु मारे गैड़े हने मैं खास के मत करी अर सिंघन झुंडाए चार्य नायक संभार रही न परै बिसंभार जनो सर प्रहारे सोइया ਪਾਰਥ ਕੋ ਸੰਗ ਲੈ ਪ੍ਰਭ ਜੂ ਬਨ ਮੋ ਧਸ ਕੈ ਬਹੁਤੇ ਮ੍ਰਿਗ ਘਾਏ ਏਕ ਨੇਕਰ ਵਾਰਨ ਸੋ ਤਕ ਏਕਨ ਕੇ ਤਨ ਬਾਨ ਲਗਾਏ ਅਸਮਨ ਕੋ ਦਬਰਾਏ ਭਜਾਇ ਕ ਕੂਕਰ ਤੇਉ ਹਨੇ ਜੋ ਪਰਾਏ ਸ੍ਰੀ ਬ੍ਰਿਜਨਾਥ ਕੇ ਅਗਰਜ ਜੇ ਉਟ ਭਾਜਤ ਭੇ ਤੇਉ ਜਾਨ ਨਾ ਪਾਏ ਸੋਇਆ ਪਾਰਥ ਏਕ ਨੇ ਮ੍ਰਿਗ ਵਾਰ ਇਕ ਆਪਹਿ ਸ੍ਰੀ ਬ੍ਰਿਜਨਾਇਕ ਘਾਏ ਜੇ ਉਟ ਭਾਜਤ ਭੇ ਬਨ ਮੈ ਸੋ ਸਵੈ ਘਾਵਾਏ तीतर जे उड़ कै नव ओर गए तिनको प्रभु बाचलाए चितन एक मृगा गह कै कब श्याम कहे जमलुक पठाए सोइया बेसरे और कोई बहारी अर बाज जुरे बहुतै संग लीने बासो कनू लगरा चरगे सिक्रेन ਤੂਤੀ ਉਕਾਬ ਸੀ ਕੋ ਸਾਜ ਕੰਠ ਜਗੋਲਨ ਦਵਾਰ ਨਵੀਨੇ ਜਾ ਸੰਗ ਹੀਰ ਚਲਾਪਤ ਭੇ ਤਿੰਨ ਪਛਨ ਤੇਜ ਇਕ ਜਾਨ ਨਾ ਦੀਨੇ ਸੋਈਆ 파ਰਥ ਹੋ ਪ੍ਰਭ ਜੀ ਮਿਲ ਕੈ ਜਵਿਆ ਸੋ ਸ਼ਿਕਾਰ ਕੀਓ ਸੁਖ ਪਾਇਓ ਆਪ ਸਮਾ ਕਬ ਸਿਉ ਤੇ ਠੌਰ ਦੂ ਹਤ ਹੀਤ ਵਢਾਇਓ ਔ ਕੋ ਦਰ ਪੀ ਕੋ ਮਨ ਔ ਸਰ ਤੌਨ ਸੋ ਛੋਰ ਅਖੇਟ ਕੀ ਦੂ ਚਲ ਕੈ ਪ੍ਰਭ ਜੂ ਜਮਨਾ ਸੋ ਯਾਰ ਜਾਤ ਤੇ ਜਲ ਪੀ ਮਨ ਕੇ ਹਿਤ ਤੋ ਹੀ ਲੋ ਸੁੰਦਰ ਨਾਰ ਨਿਹਾਰੀ ਪੂਛੋ ਕੋ ਹੈ ਕਹਾ ਇਹ ਦੇਸ ਕਯੋ ਸੰਗ 파ਰਥ ਜੋ ਗਿਰਧਾਰੀ ਆਇ ਪੁਰੰਦਰ ਕੋ ਸੁ ਭਯੋ ਤੇ ਕੇ ਸੰਗ ਬਾਤ ਉਚਾਰੀ ਕੌਣ ਕੀ ਬੇਟੀ ਹੈ ਦੇਸ ਕਹਾ ਤੋਹਿ ਕੂ ਕੌਣ ਕੀ ਨਾਰੀ ਅਥ ਜਵਨਾ ਬਾਜ ਦੋਰਾ अर्जुन ਸੇ जमुनात वए ऐसे कहो सुनाए जद पद भरि चा चित तप कीनो मैं आए सवैया त पार्थ आए कै शीश न आए सो ਸੋ जू सयो ए बैन उचारए सूरज की दोयता जमुनाए ना प्रभु जग बजार सारे बेस तपوتن काहे कियो इन औगरे के सब काज बे सारे अर्जुन उत्तर ऐसे दियो कान ਪਾਰਥ ਕੀ ਪਤਿਆ ਸੁਨ ਜਾਓ ਭਈਆ ਘੜਾਰ ਲਈ ਰਥੀ ਉਪਰ ਚੰਦ ਸੋ ਆਨਨ ਜਾਇ ਲਸੈ ਅਤ ਜੋਤ ਜਗੈ ਸੁਖ ਪੂਲਨ ਦੂ ਪਰ ਕਹਿ ਕਹਿ ਕਿਰਪਾ ਅਤਹੀ ਤਿਹ ਪੈ ਨਾ ਕਿਰਪਾ ਕਰ ਸਿਆਮ ਐਸੀ ਕੀ ਪਰ ਆਪਣੇ ਧਾਮ ਲਿਆਵਤ ਭਇਓ ਸਭ ਐਸ ਕਥਾ ਏ ਮਾਨਮ ਭੂ ਪਰ ਸੋਈਆ डार जवै रथ पै जमुना कह श्री ब्रज नायक ढेर ने आयो ब्याह के बी सवाहु जे देस्तर गयो सो लपटायो द्वारका जय सिरति प्रभु जू तुम वो पुर तए श्रचो सो सुनायो आइस देत भयो प्रभु जू कर्म सो तिन तए सो बनायो ए श्री बजे कर्नाटक ग्रंथे शिकार खेल बो संपूर्ण जमुना गोविवाद पै